मित का चित अनूप मरम ना जानीए गुणी अपार मित का चित मतलब मित चित है हों वो है। बार तो अरूप होता है वोदी उपमा ही नहीं चीज है ही नहीं बाहर का चीज नहीं है जी कोई बाहर मन होता है चित नहीं होता शरीर मन काम करता है चित नहीं करता चित्त में आया तो परे रहता और जागता देव है ਉਹ ਰੂਪ ਹੈ ਉਹ ਨਹੀਂ ਉਹ ਰੂਪ ਹੈ ਜ ਨਹੀਂ ਹੁੰਦਾ ਰੂਪ ਉਹ ਦਾ ਹੈ ਪਰ ਰੂਪ ਹੈ ਮਰਮ ਨਾ ਜਾਣੀ ਹੈ ਉਹ ਦਾ ਭੇਦ ਨਹੀਂ ਕਿਸੇ ਨੇ ਕੀਤਾ ਕਿਸੇ ਦੀ ਸ਼ਕਲ ਬਿਆਨਿਆ ਕਦੇ ਕਿਸੇ ਨੇ ਜੇ ਬਿਆਨ ਨਹੀਂ ਮਰਗੁ ਪਤਾ ਲੱਗੇ ਬਸ ਕੀ ਹੈ ਘਾ ਕਿ ਕਿਰਦ ਹੈ ਕਾਗਜ ਜਦ ਆਏਗਾ ਗੁਣ ਅਪਾਰ ਪਾਰ ਦਾ ਘਾਕ ਹੋਵੇ ਪਾਰ ਗੁਣਾ ਦਾ ਕਿ ਚਿਕੋਵੇ ਉਹਨੇ ਤੱਤ ਨੂੰ ਪਛਾਣ ਸਕਦਾ ਉਹ ਤੱਤ ਸਰੂਪ ਹੈ ਉਹਨੇ ਤੱਤ ਪਛਾਣਿਆ ਉਹ ਆਪਣੇ ਉਹਨੇ ਆਪਣਾ ਰੂਪ ਪਛਾਣਿਆ ਤੋ ਤੱਤ ਪਛਾਣਿਆ ਤੇ ਪਛਾਣਨ ਵਾਲੀ ਚੀਜ਼ ਆ ਜਾਣਨ ਵਾਲੀ ਸੀਜ਼ ਨਹੀਂ ਆ ਇਸ ਗੱਲ ਦਾ ਹੋਰ ਵੀ ਭਾਰ ਪੈ ਗਿਆ ਜੀ ਗਾਹਕ ਗੁਣੀ ਅਪਾਰ ਸੋ ਤੱਤ ਪਛਾਣਿਆ ਹਾ ਜੇ ਅਪਾਰ ਕੋ ਨਾਲ ਗਾਹਕ ਉਹ ਤਵੀ ਪਛਾਣੂ ਕੁਰਬਾਨੀ ਦਾ ਸਭ ਕੁਝ ਤੌਸਤ ਕਰੰਦੀ ਹੈ ਕੁਛ ਵੀ ਰਹਿਣਾ ਨਾ ਨਖੋ ਠੀਕ ਹੈ ਜੀ ਅਸੀਂ ਤਾਂ ਜਪਜੀ ਸਾਹਿਬ ਪੜ੍ਹ ਕੇ ਬੜੇ ਗੁਣੀ ਗਿਆਨੀ ਸਮਝਦੇ ਹਾਂ ਜੀ ਆਪਣੇ ਆਪ ਦੇਖੋ ਹੁਣ ਤੁਸੀਂ ਠੀਕ ਹੈ ਜੀ ਚਿਤਾਂ ਚਿੱਤ ਸਮਾਏ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰਹਿ ਮਾਰ ਤਾਂ ਪਾਵੇ ਸਚਤਨ ਜੁਚਿੱਤੀ ਜਦ ਘਟਬਉਂਦੀ ਹੈ ਜਾਂ ਮਨ ਆਪਣਾ ਜਿਹੜੀ ਆ ਮਰਜ਼ੀ ਛੱਡ ਲੈਂਦਾ ਫਿਰ ਇਹ ਚਿੱਤ ਹੈ ਫਿਰ ਵੀ ਇਹ ਚਿੱਤ ਹੈ ਜਦ ਇਹਨੂੰ ਚੇਤਾ ਆ ਜਾਣਾ ਆਪਣੇ ਮੂਰ ਦਾ ਫਿਰ ਇਹ ਚਿੱਤ ਹੈ ਫਿਰ ਮੰਨ ਨਹੀਂ ਕੋਨ ਮਨ ਉਹ ਨਾ ਜਿਹੜਾ ਜਨਮជា ਮਾਇਆ 'ਚ ਫਸਿਆ ਹੋਇਆ ਮਾਇਆ ਦੇ ਚਿੱਤੇ ਵਾਲਾ ਮਨ ਹੈ ਆਪਣੇ ਮੂਰ ਦੇ ਚਿੱਤੇ ਵਾਲਾ ਚਿੱਤ ਹੈ ਹੀ ਨਾਮ ਜਾਂਦਾ ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰਾਮਸਣ ਜਦ ਦੋਏ ਇੱਕ ਹੋ ਜਾਂਦੇ ਜੀ ਖਤਮ ਹੋ ਜਾਂਦੀ ਹੈ ਗੁਰ ਤੇ ਪਾਣੀ ਚਲਦਾ ਆਪਣਾ ਪਾਣਾ ਹੀ ਸਮਾਪਤ ਹੋ ਜਾਂਦਾ ਪੱਰੇ ਇਹਨੂੰ ਨਾਮ ਦਾ ਰੰਗ ਚੜਦਾ ਕਾਲਾ ਹਪਾਰ ਗੂੜਾ ਰੰਗ ਹਰਾਂ ਚੰਚਲ ਚੋਰਾ ਮਾਰ ਤਪਾਵ ਸਚ ਤਨ ਬਸ ਤੇਰੇ ਖਾਂ ਦੇ ਚੰਚਲ ਜਿਹੜਾ ਚੋਰ ਨੇ ਨਾ ਲੋਭ মোহ ਇਹਨਾਂ ਨੂੰ ਹਾਰ ਲੈਂਦਾ ਸਰ ਨਾਲ ਤਪਾਵ ਸਚ ਤਨ ਸਚ ਤਨ ਦੀ ਪ੍ਰਾਪਤੀ ਹੁੰਦੀ ਤਤ ਗਿਆਨ ਆਤਮ ਗ્ઞਾਨ ਦੀ ਪ੍ਰਾਪਤੀ ਹੁੰਦੀ ਹੈ ਬੇਜਾ ਉਹ ਫਿਰ ਹੈਗਾ ਵੀ ਚਿੱਤ ਹੈ ਚਿੱਤ ਸਮਾਏ ਵੀ ਮਨ ਚਿੱਤ ਦੇ ਵਿੱਚ ਸਮਾਉਂਦਾ ਹੈ ਜੀ। ਸਾਂਝ ਤੇ ਕੀ ਹੋ ਜਾਂਦਾ ਨੇ? ਆਪਾਂ ਦੀ ਗੱਲ ਹੋ ਰਹੀ ਹੈ ਜੀ। ਦੋਏ ਚਿੱਤੋ ਕਹਿੰਦਾ ਚਿੱਤ ਹੈ ਚਿੱਤ ਸਮਾਏ। ਫੁਲ ਮਾਇਆ ਛੱਡੀ ਹੋ ਗਿਆ ਤਾਂ ਚਿੱਤ ਹੈ। ਮਾਇਆ ਤੋਂ ਉਦਾਸੀ ਹੈ ਹੈ। ਮਾਇਆ 'ਚ ਫਸਿਆ ਤਾਂ ਮਨ। ਮਨ ਮਾਇਆ 'ਵੀ ਫਸ ਰਿਹਾ। ਮਾਇਆ 'ਚ ਫਸਿਆ ਹੋਇਆ ਮਨ। ਮਾਇਆ 'ਚ ਠੀਕ ਹੈ ਜੀ ਇਹ ਫਿਰ ਇਹ ਅਸਲੀ ਗੁਰਮਤਤਾ ਇਹੀ ਹੈ ਵੀ ਅੱਧੇ ਔਰ ਅੱਧੇ ਨੇ ਮਿਲ ਕੇ ਇੱਕ ਹੋਣਾ ਹੈ ਜੀ ਹਾਂ ਇੱਕ ਤਾਂ ਹੀ ਹੋਊਗਾ ਨਹੀਂ ਤਾਂ ਫਿਰ ਅੱਧਾ ਮਰ ਗਿਆ ਇੱਕ ਦੇ ਵਿੱਚ ਫਿਰ ਤਾਂ ਡੁੱਢ ਪਾਉਂ ਗਿਆ ਉਹ ਇੱਕ ਤਾਂ ਰਹਿ ਹੀ ਨਾ ਉਹ ਜਿਹੜਾ ਇੱਕ ਲਿਖਿਆ ਓੰਕਾਰ ਤੋਂ ਪਹਿਲਾਂ ਉਹਦਾ ਇੱਥੇ ਭਾਵ ਦੱਸਿਆ ਹੈ ਜੀ ਠੀਕ ਹੈ ਜੀ ਇਹਨਾਂ ਨੇ ਜੋ ਅਰਥ ਕੀਤੇ ਆ ਲਿਖਦੇ ਆ ਜੀ हे ਭਾਈ ਸਭ ਦੇ ਮਿੱਤਰ ਵਾਹਿਗੁਰੂ ਜੀ ਦਾ ਚਿੱਤ ਉਪਮਾ ਤੋਂ ਪਰੇ ਹੈ ਅਤੀ ਸੁੰਦਰ ਹੈ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ ਮਿਤ ਕਾ ਚਿੱਤ ਅਨੂਪ ਦੇ ਅਰਥ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਚਿੱਤ ਕੀ ਹੁੰਦਾ ਹੈ ਤੇ ਮਿੱਤ ਕੀ ਹੁੰਦਾ ਹੈ ਜੀ ਮਿੱਤ ਕਾ ਚਿੱਤ ਦੱਸੋਗੇ ਇਹ ਕਹਿੰਦੇ ਮਿੱਤ ਵਾਇਗੁਰੂ ਹੈ ਮਿੱਤਰ ਗੁਰਮੁਖ ਨੂੰ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿਹਨੇ ਗੁਰ ਨੇ ਗੁਰਮੁਖ ਨੇ ਮਿੱਤਰ ਇਹਨੇ ਸਾਰੇ ਸਾਰੇ ਜਿਨ੍ਹਾਂ ਦੇ ਨਾਲੋਂ ਬੈਰ ਵਿਰੋਧ ਖਤਮ ਹੋ ਗਿਆ ਨਾ ਨਾ ਕੋਈ ਬੈਰੀ ਨਹੀਂ ਬਗਾਨਾ ਉਹ ਸਾਰੇ ਹੀ ਬਿੱਤਲੇ ਗੁਰਮੁਖ ਵਾਸਤੇ ਮੈਂ ਤਾਇਆ ਗੁਰ ਸਿੱਖ ਵਾਸਤੇ ਮੈਂ ਤਾਇਆ ਹਾਂ ਲਫ਼ਜ਼ ਅੱਛਾ ਇਹ ਵਾਹਿਗੁਰੂ ਵਾਸਤੇ ਕਹਿ ਤੇ ਨੇ ਮਿੱਤ ਕੇ ਮੈਂ ਕਹਾਂਗਾ ਕੀ ਦਾ ਬਿਜੁਨ ਕਾਲ ਸੀ ਹੋ ਕਿਸੇ ਦਾ ਠੀਕ ਹੈ ਜੀ ਫੇਰ ਜਿਹੜੀ ਅਗਲੀ ਪੰਕਤੀ ਹੈ ਜੀ ਤੇ ਚਿੱਤਾਂ ਚਿੱਤ ਸਮਾਇ ਹੋਵੇ ਰੰਗ ਘਣਾ ਉਹ ਕਹਿੰਦੇ ਆ ਜੀ ਪਰਭੂ ਪਿਆਰੇ ਦੇ ਦਿਲ ਵਿੱਚ ਆਪਣਾ ਦਿਲ ਮਿਲ ਜਾਵੇ ਤਾ ਆਤਮਾ ਉਤੇ ਆਨੰਦ ਰੂਪੀ ਘਣਾ ਰੰਗ ਚੜਦਾ ਹੈ। ਨਾਮ ਦੇ ਰੰਗ ਵੀ ਨਜ਼ਰ ਆ ਰਹੇ ਨੇ। ਇਹਨਾਂ ਸਮਾਉਣਾ ਹੈ। ਇਹ ਸਿੱਧਾ ਪਰਮੇਸ਼ਰ 'ਚ ਸਮਾ ਰਹੇ ਜਾ ਕੇ ਜੀ। ਫਿਰ ਆਇਆ ਨੇ ਇਹਨੂੰ ਦਾੜਾ ਕਨਸੈਪਟ ਹੈਗਾ। ਇਹ ਤਾਂ ਅੰਨਾ ਦਾੜਾ ਵਾਲਾ ਖਤਮ ਕਰਤਾ ਚੱਕਦਾ ਉਥੋਂ। ਜੇ ਤੇ ਰਖ ਲੰਦੇ ਫੇਰ ਤਾਂ ਇਹਦੀ ਮਤ ਆ ਬકરી ਮਾ ਥੋੜੀ ਗਈ ਫੇਰ ਗੋਰ ਮਾ ਜਿਹੜੀ ਹੈ ਨਿਆਰੀ ਮਾ ਥੋਗੀ ਸੀ ਨਿਆਰੀ ਮਾ ਤੈਨੂੰ ਸਾਫਤ ਹੋਣ ਦੇ ਰਿਆ ਇਹ ਜਿਉਂ ਸਾਡਾ ਨਿਆਰਾਪਣ ਉਹ ਦਾਲ ਹੈਗੀ ਪਹਿਲਾਂ ਮਨ ਚਿੱਤ ਚ ਸਮਾਉਣਾ ਤਾਂ ਰੰਗ ਚੜਨਾ ਹੈ ਜੀ ਮਤਲਬ ਨਾਮ ਨੇ ਰੰਗ ਨਾਲੇ ਰੰਗੇ ਜਾਣੇ ਦੋਹਾਂ ਦਾ ਰੰਗੇ ਕੋਣ ਹਨ ਫੇਰ ਲਾਹ ਠੀਕ ਹੈ ਜੀ ਪੂਰਨ ਬ੍ਰਹਮ ਹੋ ਰਿਹਾ ਜੀ ਸਿਰਫ ਪੂਰਨ ਬ੍ਰਹਮ ਹੋ ਰਿਹਾ ਇਹ ਸਿੱਧਾ ਇਹਨੂੰ ਪਰਮ ਬ੍ਰਹਮ ਸਮਝ ਲੈਨੇ ਆ ਉੱਥੇ ਫਿਰ ਇਹਨਾਂ ਨੂੰ ਭੇਦ ਸਮਝ ਨਹੀਂ ਆ ਰਿਹਾ ਜੀ। ਨਾ ਠੀਕ ਹੈ ਜੀ ਇੱਥੇ ਵੀ ਹਰ ਹਾਂ ਚੰਚਲ ਚੰਚਲ ਚੋਰ ਆਪਣੇ ਆਵੇ ਮਾਰਨੇ ਪਰਨੇ ਕਿਸੇ ਨਹੀਂ ਨਹੀਂ ਮਾਰਨੇ ਚਾਹ ਰੋ ਚੰਚਲ ਚੋਰ ਨੂੰ ਆਪਣੇ ਮਾਰਨੇ ਪਰਨੇ ਆਪ ਹੀ ਆਪਣੇ ਹੱਥੀਂ ਆਪਾਂ ਆਪੇ ਨਾ ਆਪਾਂ ਹਰ ਹਾਂ ਦਾ ਮਤਲਬ ਕੀ ਕਰਾਂਗੇ ਮੇਰੇ ਬੱਸ 'ਚ ਕੁਝ ਨਹੀਂ ਹੈ। ਬੱਸ ਮੇਰੇ ਵੀ ਨਹੀਂ ਹੈ ਵੀ ਮੈਂ ਕਿਸੇ ਦੇ ਮਾਰ ਦੱਸਣ ਵਾਲਾ ਦੱਸ ਸਕਦਾ ਮਾਰ ਨਹੀਂ ਸਕਦਾ। ਦੂਵੇ ਆਪਣੇ ਮਾਰ ਸਕਦਾ ਅਸੀਂ ਗੁਰਬਾਣੀ ਤੋਂ ਗਿਆਨ ਲੈ ਕੇ ਆਪਣੇ ਚੰਚਲਚੋਰ ਮਾਰਨੇ ਹੈ ਜੀ ਬਿਲਕੁਲ ਭਗਤਾਂ ਨੇ ਸਾਨੂੰ ਰਸਤਾ ਦੱਸਿਆ ਜੇ ਅਸੀਂ ਉਹਨੂੰ ਮੰਨਾਂਗੇ ਤਾਂ ਸਾਡੇ ਨਾਲ ਵੀ ਇਹ ਅਵਸਥਾ ਸਾਡੀ ਵੀ ਹੋ ਜਾਈਗੀ ਹੈ ਜੀ ਉਸ ਪ੍ਰਸਾਦ ਦੇ ਬੁੱਧੀ ਨਾਲ ਪਊਗਾ ਠੀਕ ਹੈ ਜੀ ਇੱਥੇ 12ਵੇਂ ਛੰਦ ਦੀ ਸਮਾਪਤੀ ਹੈ ਜੀ